ਸਤਿਕਾਰਯੋਗ ਪਸਤ ਸਾਧ ਸੰਗਤ ਜੀ ਸਾਰੇ ਗੱਜ ਕੇ ਆਖੋ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਆਪਣੀ ਰਸਨਾ ਪਵਿੱਤਰ ਕਰੋ ਸਾਰੇ ਗੱਜ ਕਾ ਕੋ ਤਨ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਇਸਨਾ ਪਵਿੱਤਰ ਕਰੋ ਗੱਜ ਕੇ ਆਖੋ ਤਨ ਸ੍ਰੀ ਸਤਗੁਰ ਆਮ ਸਿੰਘ ਸੱਚੇ ਬਾਦਸ਼ਾਹ ਜੀ ਅਤੇ ਜੇ ਦੀ ਕਿਰਪਾ ਦੁਆਰਾ ਅਸੀਂ ਇੱਥੇ ਸਾਰੇ ਇਕੱਤਰ ਹੋਏ ਆ ਅੱਜ ਸਾਡੇ ਸਾਨੂੰ ਇਸ ਪਾਸੇ ਲਾਉਣ ਵਾਲੇ ਸਾਡੇ ਹਮੇਸ਼ਾ ਰਖੇਕ ਸਾਰੇ ਗੱਜ ਘਾਕੋ ਤਾਨਸੀ ਸਤਗੁਰਜ ਜੀ ਇਸੇ ਸੱਚੇ ਪਾਤਸ਼ਾਹ ਜੀ ਜੋ ਕਿ ਸਮੇਂ ਦੇ ਮਾਲਕ ਹਨ ਸਾਧ ਸੰਗ ਦੀ ਅਕਤਰਤਾ ਦੇਖ ਕੇ ਇਸ ਤਰ੍ਹਾਂ ਜਾਪਦਾ ਕਿ ਕਾਕਾ ਰਾਜਪੀਰ ਸਿੰਘ ਸਾਰੇ ਪਰਿਵਾਰਾਂ ਦੇ ਵਿੱਚ ਬੜਾ ਅੱਛਾ ਪ੍ਰਭਾਵ ਸੀਗਾ ਇਸ ਤਰ੍ਹਾਂ ਹੁੰਦਾ ਹੈ ਕਿ ਹਾਏ ਜੇ ਸਮੇਂ ਤੇ ਯਾਦ ਆਂਦੀ ਆ ਲੇਕਿਨ ਇੱਕ ਦੂਏ ਵੱਲ ਦੇਖ ਕੇ ਫਿਰ ਮਨ ਨੂੰ ਭਰੋਸਾ ਆ ਜਾਂਦਾ ਤੇ ਵੱਡੀ ਜਿਹੜੀ ਗੱਲ ਇਹ ਆ ਕਿ ਸਾਡੇ ਸਿਰ ਤੇ ਸਤਿਗੁਰੂ ਜੀ ਨੇ ਜਿਹੜੇ ਸਾਨੂੰ ਹਮੇਸ਼ਾ ਹੀ ਸਾਨੂੰ ਸਿਹਤ ਬਖਸ਼ਦੇ ਨੇ ਉਹ ਜਿਹੜਾ ਨਰੋਬੀ ਦਾ ਸੱਚੇ ਪਾਤਸ਼ਾਹ ਜੀ ਦਾ ਆਪ ਜੀ ਨੇ ਪਾਸ਼ਨ ਸੁਣਿਆ ਸੀਗਾ ਉੱਤੇ ਵੀ ਇੱਕ ਬੜਾ ਨੌਜਵਾਨ ਸੀ ਉਹਦਾ ਮੋਟਰ ਦਾ ਐਕਸੀਡੈਂਟ ਹੋਇਆ ਸੀ ਤੇ ਉਹ ਵੀ ਉੱਥੇ ਚੜਾਈ ਕਰ ਗਿਆ ਸੀ ਉਸ ਤੋਂ ਬਾਅਦ ਫਿਰ ਅਤੇ ਰੁਪਿੰਦਰ ਸਿਆਨ ਉਹ ਵੀ ਇਸੇ ਤਰ੍ਹਾਂ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਦੂਏ ਵੱਲ ਦੇਖ ਕੇ ਨਾ ਮਨ ਨੂੰ ਭਰੋਸਾ ਦਾ ਤਸੱਲੀ ਆਂਦੀ ਆ ਥੋੜਾ ਆਸਰਾ ਮਿਲ ਜਾਂਦਾ ਕਿ ਜੋ ਉੱਥੇ ਵਰਤਿਆ ਉਹ ਮੇਰੇ ਨਾਲ ਵਰਤਿਆ ਇਹ ਸਤਗੁਰ ਦੀ ਰਜਾਇਆ ਜਿਸ ਦੇ ਵਿੱਚ ਰਹਿਣਾ ਹੀ ਸਾਡਾ ਫਰਜ਼ ਬਣਦਾ ਔਰ ਇਹ ਬਿਲਕੁਲ ਇਸ ਤਰ੍ਹਾਂ ਪ੍ਰਤੀਤ ਰੱਖਣੀ ਕਿ ਸਤਗੁਰ ਦੀ ਰਜਾਤ ਹੋ बगैर ਇੱਕ ਪੱਤਾ ਵੀ ਨਹੀਂ ਚੁਲਾ ਬਾਣੀ ਵੀ ਕਹਿੰਦੀ ਆ ਸਾਡੇ ਸਿਆਣੇ ਸਾਨੂੰ ਛੋਟਿਆਂ ਹੁੰਦੇ ਤੋ ਸੁਣਾਉਂਦੇ ਆਏ ਨੇ ਉਹਨੂੰ ਵੀ ਬਾਣੀ ਜਦੋਂ ਤੁਸੀਂ ਆਪ ਕੀ ਪੜਦੇ ਹੋ ਉਹਦੇ ਵਿੱਚ ਸਾਨੂੰ ਇਹ ਉਜਾਜਨਾ ਮਿਲਦੀ ਆ ਕਿ ਸਤਿਗੁਰ ਨੂੰ ਕਿੱਦਾਂ ਲੱਭਣਾ ਕਿੱਦਾਂ ਮਿਲਣਾ ਔਰ ਉਸ ਨਾਮ ਦੀ ਪ੍ਰਾਪਤੀ ਕਿੱਦਾਂ ਕਰਨੀ ਆ ਇਹ ਨਾਮ ਦੀ ਇੰਟਰਪ੍ਰੀਟੇਸ਼ਨ ਜਿਹੜੀ ਆ ਉਹ ਬਹੁਤ ਤਰੀਕਿਆਂ ਨਾਲ ਹੋਈ ਆ ਲੇਕਿਨ ਬੜੇ ਖੋਜ ਦੇ ਨਾਲ ਤੁਸੀਂ ਮਾਪੁਰਸ਼ਾਂ ਕੋਲ ਬੈਠੋ ਸਾ ਸੰਗਤ ਜੀ ਨਾਮ ਤੋਂ ਬਿਗਾਰੇ ਛਟਕਾਰਾ ਨਹੀਂ ਹੈ ਅਗਾਹ ਜਾ ਕੇ ਸਾਨੂੰ ਉਹ ਸਤਿਗੁਰ ਦੇ ਗੋਦ ਦੇ ਵਿੱਚ ਆਸਥਾਨ ਨਹੀਂ ਮਿਲਣਾ ਜੇ ਨਾਮ ਨਾ ਲਿਆ ਨਾਮ ਜਪ ਕੇ ਹੀ ਉੱਥੇ ਪਹੁੰਚ ਹੋਣਾ ਕਿਉਂਕਿ ਬਾਣੀ ਦਸਦੀ ਹੈ ਸੋ ਇਸ ਮੌਕੇ ਦੇ ਉੱਤੇ ਮੈਂ ਇਹ ਵੀ ਸਾ ਸੰਗਤ ਪ੍ਰਾਰਥਨਾ ਕਰਾਂਗੇ ਜੇ ਕਿਸੇ ਨੇ ਨਾਮ ਨਹੀਂ ਲਿਆ ਤੇ ਸਾਡੇ ਸੂਬਾ ਸਾਹਿਬਾਨ ਹੈਗੇ ਨੇ ਉਹਨਾਂ ਕੋਲੋਂ ਨਾਮ ਦੀ ਪ੍ਰਾਪਤੀ ਕਰ ਸਕਦੇ ਹੋ ਔਰ ਉਹ ਕਿਸ ਤਰ੍ਹਾਂ ਜਪਣਾ ਉਹ ਪੂਰੀ ਆਧਿਨੁਸੇਦ ਦੇਣਗੇ ਹੋਰ ਵੀ ਇੱਥੇ ਹੈਗੇ ਨੇ ਸੱਜਣ ਜਿਹਨਾਂ ਨੂੰ ਨਾਮ ਦੇਣ ਦੀ ਸੱਚੇ ਵਾਸ਼ੇ ਵੱਲੋਂ ਹੁਕਮ ਹੈ ਉਹ ਵੀ ਉੱਥੋਂ ਵੀ ਮਿਲ ਸਕਦਾ ਸੋ ਸਾਧ ਸੰਗਤ ਜੀ சொந்த ਪਰਿਵਾਰ ਵੱਲੋਂ जिन्ना जिन्ना ने भी आके एथे ओना ने एस मौके दे उत्ते एस टाइम दे उत्ते आके ओना दा साथ दित्ता ਦੀ दी अर्ज विनती मान के एथे आए हन ओना सारेया दा बहुत बहुत बहुत बहुत ओ ऋणी हन और बड़े अस्सी शोध शोध परिवार दा भी बड़ा धन्यवाद करदे हां जिन्ना ने के ऐसे मौके ਦੇ ਉੱਤੇ ਇੱਕ ਕਿਸਮ ਦਾ ਪ੍ਰਚਾਰ ਹੋ ਜਾਂਦਾ ਹੈ ਪ੍ਰਚਾਰ ਇਸ ਤਰ੍ਹਾਂ ਹੁੰਦਾ ਹੈ ਇਸ ਗੁਰਸਿੱਖੀ ਦਾ ਪ੍ਰਚਾਰ ਹੈ ਕਿ ਮਤ ਕੋ ਪਿੱਛੇ ਰੋਸੀ ਸੂ ਮੈਂ ਮੂਲ ਨਾ ਪਾਇਆ ਅਸੀਂ ਕਿੰਨਾ ਗਮਾਂਦੇ ਇਸ ਚੀਜ਼ ਨੂੰ ਇਹ ਮੰਨਣ ਦੀ ਕਿਉਂਕਿ ਸਤਗੁਰੂ ਜੀ ਆਪਣੇ ਬਚਨਾਂ ਚ ਕਹਿੰਦੇ ਨੇ ਕਿ ਸਾਡਾ ਨਾ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਹੈ ਜੋ ਅਸੀਂ ਕਹਿੰਨੇ ਆ ਉਹ ਅਸੀਂ ਕਰਦੇ ਨਹੀਂ ਆ ਅਸੀਂ ਕਿਤਾਬਾਂ ਪੜ੍ਹ ਕੇ ਉਸ ਦੇ ਵਿੱਚੋਂ ਅਸੀਂ ਵਿਚਾਰ ਸਾਧ ਦੇ ਵਿੱਚ ਪੇਸ਼ ਕਰਦੇ ਆ ਲੇਕਿਨ ਉਹਦੇ ਵਿੱਚ ਇਹ ਦੇਖਣਾ ਕਿ ਅਸੀਂ ਉਹਦੇ ਤੇ ਖੁਦ ਕਿੰਨਾ ਕੁ ਉਹਦੇ ਉੱਤੇ ਅਸੀਂ ਉਹਨਾਂ ਅਸੂਲਾਂ ਨੂੰ ਮੰਨਦੇ ਆ ਸਤਿਗੁਰ ਜੀ ਸਤਗੁਰ ਜੀ ਜੀ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖਾਰਵੰਦਰ ਆਹੀਂ ਤੇ ਪਾਸ਼ੰਦ ਦੇ ਵਿੱਚ ਹਮੇਸ਼ਾ ਵੀ ਜਦੋਂ ਅਸੀਂ ਉਹਨਾਂ ਦੇ ਸਨਮੁਖ ਹੋ ਕੇ ਉਹਨਾਂ ਦੇ ਸਾਹਮਣੇ ਬੈਠ ਕੇ ਉਹਨਾਂ ਦੇ ਪਵਿੱਤਰ ਉਪਦੇਸ਼ ਸਰਵਣ ਕਰਦੇ ਆਂ ਤੇ ਜਪਜੀ ਸਾਹਿਬ ਦੀ 22 ਪੌੜੀ ਹਮੇਸ਼ਾ ਹੀ ਉਹ ਸਾਨੂੰ ਯਾਦ ਕਰਵਾਉਂਦੇ ਨੇ ਭਰੀਏ ਹੱਤ ਪੈਰ ਤਨ ਦੇਹ ਪਾਣੀ ਤੋਤੇ ਉਤਰੋ ਸਖੇ ਨੂਤ ਪਲੀਤੀ ਕਪੜੋ ਦੇ ਲਈ ਹੋ ਤੋਈ ਪਰ ਇਹ ਮਤ ਪਾਪਾ ਕੇ ਸੰਗ ਉਹ ਧੋਪੈ ਨਾ ਵਹਿ ਰੰਗ ਉਹ ਨਾਮ ਜਿਹੜਾ ਕਿ ਸਾਨੂੰ ਸਾਨੂੰ ਇਸ ਸੰਸਾਰ ਦੇ ਜਿਹੜੇ ਪਾਪ ਸਾਗਰ ਤੋਂ ਇਹਨਾਂ ਨੇ ਸਾਨੂੰ ਪਾਰ ਕਰਵਾਣਾ ਉਹ ਨਾਮ ਉਹ ਸਤਿਗੁਰੂ ਕੋਲੋਂ ਮਿਲਦਾ ਹੈ ਇਹ ਦਾਤ ਸੋ ਆਪ ਜੀ ਆਹ ਸਾਸ ਦਾ ਬਹੁਤ-ਬਹੁਤ ਧੰਨਵਾਦ ਹੈ ਆਪਨੇ ਬੜਾ ਸਹਿਯੋਗ ਦਿੱਤਾ ਹੁਣ ਅਗਾ ਦਾ ਪ੍ਰੋਗਰਾਮ ਆਪ ਜੀ ਸਰਵਣ ਕਰੋ ਅਗਾਂ ਦੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਹਨ ਸਾਧ ਸੰਗ ਜੀ ਬੋਲਦਿਆਂ ਕੋਈ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਕਿਉਂਕਿ ਇਨਸਾਨ ਹਮੇਸ਼ਾ ਕੋਲਣਹਾਰ ਹੈ ਸਤਗੁਰ ਬਖਸ਼ਣਯੋਗ ਹੈ ਆਪ ਸਾਧ ਨੇ ਖਿਮਾ ਦੀ ਦਤਾ ਬਖਸ਼ਣੀ ਸਸਿ ਗਾਲ ਜੀ ਹਾਂਜੀ ਦਾ ਬਹੁਤ ਧੰਨਵਾਦ ਹੈ ਸਾਸ ਨੇ ਅਗਲੇ ਪ੍ਰੋਗਰਾਮ ਇਸ ਪ੍ਰਕਾਰ ਹਨ ਜਿਸ ਤਰ੍ਹਾਂ ਕਿ ਤੇ ਨਿਤਨੇਮ ਹੁੰਦਾ ਹੈ ਰੋਜ਼ਾਨਾ ਇਤਨੇ ਹੋਏਗਾ ਦੋਸਤਰਾ ਮਨ ਅਸਰੇ ਅਗਲੇ ਵੀਰਵਾਰ ਦਾ ਸ਼ਾਮ ਦਾ ਨਿਤਨੇਮ 7:30 ਤੋਂ 8:30 ਹੋਏਗਾ ਅਮ ਇੱਥੇ ਜੁੜੀ ਪ੍ਰਸ਼ਾਦੀ ਸੇਵਾ ਸੰਤ ਸਤਪਾਲ ਸਿੰਘ ਦੀ ਪੁੱਲਰ ਵੱਲੋਂ ਤੇ ਮੇਡ ਦੇ ਲੱਕੇ ਵਿੱਚ ਸੰਤ ਸਿੰਘ ਦੀ ਉਹਨਾਂ ਦੇ ਗ੍ਰਾਵੀਕੇ ਸੰਤ ਲੋਕ ਸਿੰਘ ਪਮਰਾ ਉਹਨਾਂ ਦੇ ਗ੍ਰਾਵੀਕੇ ਪ੍ਰੋਗਰਾਮ ਹੋਏਗਾ ਤੇ ਅਗਲੇ ਜੇਠਵਾਰ ਦਾ ਜਿਸ ਨਾਲ ਪਨੀ ਨੂੰ ਜਾਣਕਾਰੀ ਹੈਗੀ ਹੈ ਸੱਚੇ ਪਾਤਸ਼ਾਹੀ ਸਿਸਤ ਗੁਰਪਤਾਪ ਸਿੰਘ ਜੀ ਪੰਜ ਪਾਦਰੋ ਦਾ ਦਿਵਸ ਹੈਗਾ ਜਿਸ ਦਿਨ ਜੋਤੀ ਜੋਤ ਸੱਚ ਪਾਏ ਸਵਾ ਸੋ ਉਹ ਵਾਪਾ ਪੁਰਬਤੇਰਾਂ ਮਿਲਕੇ ਇਸਾਰੇ ਨੇ ਮਨਾਣਾ ਹੈ ਅਤੇ ਉਸ ਦਿਨ ਸਾ ਸਿੰਘ ਜੀ ਪ੍ਰੋਗਰਾਮ ਛੇ ਤੋਂ ਸਤ ਤਿੰਨ ਹੋਏਗਾ ਅਤੇ ਸਤ ਤੋਂ ਅਸਰੇ ਅੱਤਕਰ ਕਥਾ ਕੀਰਤਨ ਦੀਵਾਨ ਦਾ ਪ੍ਰੋਗਰਾਮ ਹੈਗਾ ਸੋ ਬੇਨਤੀ ਹੈ ਆਪ ਜੀ ਸਾਰੇ ਕਿਰਪਾ ਕਰਕੇ ਇੱਥੇ ਆ ਕੇ ਦਰਸ਼ਨ ਦਿਓਗੇ ਅਤੇ ਅੱਜ ਦਾ ਵੀ ਜਿਹੜਾ ਕੀਰਤਨ ਤਾਂ ਆਪ ਜੀ ਨੇੰਨ ਮੰਨੇ ਹੈ ਸਾਰੇ ਰਾਗੀ ਜਥੇ ਦਾ ਬਹੁਤ ਬਹੁਤ ਧੰਨਵਾਦ ਹੈ ਅਤੇ ਬੇਨਤੀ ਕਰਾਂਗੇ ਕਿ ਆ ਤਰ੍ਹਾਂ ਹੀ ਅਗਲੇ ਹਫਤੇ ਵੀ ਸਾਰੇ ਕਿਰਪਾ ਕਰਕੇ ਸਾਰੇ ਦਰਸ਼ਨ ਦਿਨ ਜਿਨੇ ਵੀ ਆਪਣੇ ਪ੍ਰੋਗਰਾਮ ਸੰਸਾ ਸਿੰਘ ਜੀ ਸੋ ਅੰਤ ਵਿੱਚ ਸਾਸ ਸਿੰਘਤਾ aí ਦਾ ਬਹੁਤ ਬਹੁਤ ਧੰਨਵਾਦ ਹੈ ਹੁਣ ਪ੍ਰਸ਼ਾਤੋਪ੍ਰੰਤ ਸੰਤ ਕਰਤਾਰ ਸਿੰਘ ਜੀ ਅਤੇ ਸਾਰੇ ਪਰਿਵਾਰ ਵੱਲੋਂ ਲੰਗਰ ਵੀ ਤਿਆਰ ਹੈ ਮੈਂ ਐਨ ਆਈ ਕਹਿੰਦਾ ਸਭ ਤੋਂ ਅੱਗੇ ਮੰਗਦਾ ਸਾਹਿਬ ਜੀ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਗੁਰੂ ਚਕਜੀਤ ਸਿੰਘ ਸੱਚੇ ਪਾਤਸ਼ਾਹ ਜੀ